ਪਰਬ ਕੋ ਸਿਮਰੇ ਸੇ ਪਰਉਪਕਾਰੀ ਪਰਬ ਕੋ ਸਿਮਰੇ ਤੇਰੇ ਸਾਥ ਬੋਲਿ ਹਾਰੀ ਕੋ ਸਿਮਰੇ ਸੇ ਪਰਉਪਕਾਰ ਦਮੀ ਲੋਖੋ ਪਰਉਪਕਾਰ ਕਰਨੇ ਜੂਏ ਦਾ ਭਲਾ ਕਰਨੇ ਕਿਸੇ ਦਾ ਭਲਾ ਕਰਦੋ ਅ ਜਿੱਦ ਨੂੰ ਸੀ ਸੇਵਾ ਕਰਨਿਆ ਸੇਵਾ ਲਾਹਣ ਸਪਾਸਲੇ ਦਿਓ ਉਹ ਫਿਜ਼ੀਕਲ ਆ ਜਾਂਦੀ ਹੈ ਸਾਡੇ ਕੋਲ ਬਾਦੂ ਵਰਮਾ ਦੀ ਸ਼ਿਕਾਇਤ ਆਉਂਦੀ ਹੈ ਅ ਗੋਸਤੀ ਸੇਵਾ ਚਾਹੁੰਦੇ ਕਾਰ ਉਹ ਵੀ ਬਦਲ ਲਿਆ ਪਰ ਆਮ ਤੌਰ ਤੇ ਸੇਵਾ ਦੀ ਫਿਜ਼ੀਕਲ ਕੋਈ ਨਹੀਂ ਜਿਨ ਕੰਕਰ ਕਾਂਡ ਵੀ ਗੈਤਾ ਘਾਂ ਕਰਦੇ ਫਰਗੇ ਦਾ ਆਪ ਵਿੱਚ ਰਹੇ ਫਿਰ ਸੇਵਾ ਵੀ ਠੀਕ ਹੈ ਜੇ ਭਾਇ ਦੀ ਕੋਖ ਧੋਗ ਰਹੇ ਸੇਵਾ ਕਰੇ ਫਿਰ ਉਸੇਵਾ ਵੀ ਠੀਕ ਹੈ ਸੇਵਾ ਕਰਕੇ ਕਾਮਨਾ ਨਾ ਕਰੇ ਉਹਦੇ ਚੇਰੂ ਸੇਵਾ ਠੀਕ ਹੈ ਐਵੇਂ ਸੇਵਾ ਕਰ ਤੋਂ ਇਹ ਕੰਮ ਹੀ ਜੇ ਕਾਮਨਾ ਨੂੰ ਰਾਤੇ ਸੇਵਾ ਕਰਦਾ ਕਿ ਨਾ ਕਵੀਰ ਬਾਲਾ ਫੇਰਦਾ ਤਾਂ ਕਾਮਨਾ ਰੱਖ ਕੇ ਫੇਰਦਾ ਤਾਂ ਤੁਹਾਨੂੰ ਕੁਝ ਮਿਊਗਾ ਉਹ ਮਾਰਕਲ ਸੀ ਜਿਹੜੀ ਅਸੀਂ ਇੱਛਾ ਰੱਖ ਕੇ ਕੋਈ ਬਾਲਾ ਫੇਰਦੇ ਆਂ ਆ ਸਮਾਧੀ ਲਾਦੇ ਆਂ ਉਹ ਉਹ ਤਾਂ ਬੇਕਾਰ ਹੈ ਉਹ ਤਾਂ ਪ੍ਰਾਪਤੀ ਨਹੀਂ ਨੇ ਕਬੀ ਤਾਂ ਹੋਈ ਨਹੀਂ ਹੈ ਫਿਰ ਤਾਂ ਇਹ ਜ਼ਿਆਦਾ ਹੈ ਬਾਲਾ ਜਦੋਂ ਪ੍ਰਾਪਤੀ ਪਹਿਲਾਂ ਹੋ ਚੁੱਕੀ ਹੈ ਸੰਤੋਖ ਹੈ ਸੰਤੋਖ ਤੋਂ ਬਾਅਦ ਜੇ ਕੋਈ ਵੀ ਕੰਮ ਕਰੂਗਾ ਉਹ ਸੇਵਾ ਹੁੰਦਗੀ ਉਹ ਪਹਿਲਾਂ ਸੇਵਾ ਹੋਈ ਨਹੀਂ ਸਕਦੀ ਫਿਰ ਉਹਦੇ ਆਪਣੇ ਅੰਦਰ ਇੱਛਾਵਾਂ ਨੇ ਜਿਹੜੀ ਪੂਰੀਆਂ ਹੋਈਆਂ ਨਹੀਂ ਜਾਂ ਉਹਦੀਆਂ ਆਪਣੀ ਇੱਛਾਵਾਂ ਪੂਰੀਆਂ ਹੋ ਗਈਆਂ ਜਾਂ ਇੱਛਾਵਾਂ ਦੇ ਰੂਪ ਦੀ ਵੈਲਿਊ ਉਹਨੂੰ ਘੱਟ ਲੱਗਣ ਲੱਗੀ ਇਹ ਇੱਛਾਵਾਂ ਖਜ਼ਾਨਾ ਅਸਲ ਜਿਹੜੀ ਜੀਵ ਮੁਕਤੀ ਕਹਿੰਦੇ ਨੇ ਮੁਕਤੀ ਕਾ ਤਾਂ ਮਿਲਦੀ ਵੀ ਚੀਜ਼ ਤੋਂ ਮੁਕਤੀ ਮਿਲਦੀ ਕੋਈ ਚਾਹ ਮਾਤੋਂ ਮੁਕਤੀ ਮੰਗਣੀ ਹੈ ਅਸਲ ਤੇ ਇਹ ਕਿਹੜਾ ਕਰਦੀ ਹੈ ਸ੍ਰੇਸ਼ਨਾ تیر ਰਲ ਕੱਢੀ ਤਰ ਕਿਉਂ ਵੱਢ ਲਿਓ ਨਾ ਕਰ ਕੋਈ ਤੋਟ ਨੇ ਜੇ ਸ੍ਰੇਹੜਾ ਦੇ ਕੱਡੇ ਉਹ ਬਿੰਦ ਕੱਡੇ ਪੈਦਾ ਮੰਗਦੇ ਇਹ ਕੱਡਿਆ ਤੋਂ ਮੁਕਤੀ ਹੋਣੀ ਪੈ ਆਪਣੇ ਪੈਗਾ ਹੋਈ ਜਦ ਦੀ ਆ ਦੇਖਣਾ ਕਿ ਇੱਕ ਹਸੂਨ ਆਪੇ ਪੈਦਾ ਹੁੰਦਾ ਹੈ ਧਰਤੀ ਤੋਂ ਉਹਦੇ ਬੁੱਕੀ ਪਰਮਾਤਮਾਤਰੀ ਜਦੋਂ ਜਾਨੋ ਰਿਜ ਤੇ ਤਰਦੋ ਵੀ ਕਦੇ ਕੋਈ ਜੋਈ ਬਣੂ ਕਦੇ ਕੁਝ ਬਣਾਉਂਦੇ ਨੇ ਕਦੇ ਗੁੱਡ ਉਹ ਤਾਂ ਉਹ ਖੜਾ ਉਹਨਾਂ ਦੇ ਪਿੱਛੇ ਪਾਣਾ ਕੁਦਰਤ ਹੈ ਉਹਦੀ ਲੋੜ ਹੈ ਉਹ ਕਾਫੀ ਚੀਜ਼ੀ ਆਪਾਂ ਨੂੰ ਨਹੀਂ ਪਤਾ ਉਹਦੇ ਕਿ ਖਬਰਾਂ ਕੀ ਕੀ ਤਾਂ ਤੌਰਨੇ ਹਵਾਜ ਕੀ ਕੀ ਹੋ ਉਹਦਾ ਰੋਲ ਹੁੰਦਾ ਕੋਈ ਨੂੰ ਪਤਾ ਹੈ ਉਹ ਤਾਂ ਨਹੀਂ ਗੱਲ ਉਹ ਹੁੰਦਾ ਚਲੋ ਅਲੱਗ ਸਵਾਲ ਹੈ ਪਰ ਉਪਕਾਰ ਜਿਆਦਾ ਹੋ ਸਕਦਾ ਹੈ ਜਦ ਸਬੂੜ ਚੱਲੇ ਜਦ ਤੋਂ ਬਾਅਦ ਪਹਿਲਾਂ ਪਰ ਉਪਕਾਰ ਨਹੀਂ ਤਾਂ ਆ ਗਿਆ ਜਾਨੂ ਪਰ ਉਪਕਾਰੀ ਉਹ ਆਇਆ ਜਿਹੜਾ ਉਹ ਮੇਰੇ ਜਰਾ ਰਾਜਾ ਰਾਮ ਪਤਾ ਉਦੋਂ ਪਰ ਦੀ ਗੱਲ ਕੀਤੀ ਪਹਿਲਾਂ ਚੱਲੇ ਨਹੀਂ ਸਕਦੀ ਕੋਡ ਹੋਈ ਨਹੀਂ ਦਰਦਾ ਪਰ ਹੋਈ ਨਹੀਂ ਦਰਦਾ ਪਰ ਪਰ ਕਰਕੇ ਵੀ ਹੋ ਆਪਣਾ ਅਵਕਾਰ ਹੋਇਆ ਦੀ ਜਨਨ ਚ ਦੂਏ ਦਾ ਤੇ ਮਿਹਜੂ ਫਿਰ ਆਪਣੇ ਅਵਕਾਰ ਦੀ ਚਿੰਤਾ ਦੇਖਦਾ ਮੈਂ ਬੂਜੋ ਨਾ ਦੂਏ ਰੂਪ ਮੇਗਾ ਰੂਪ ਇਹ ਮੈਂ ਬਾਹਰ ਆ ਗਿਆ ਤੂੰ ਤੂੰ ਫਿਰ ਤਾਂ ਮੈਂ ਥੋਸ ਆਦਮੀ ਅੰਦਰ ਆ ਰਿਹਾ ਅੰਦਰ ਵੀ ਕੁਛ ਕੀ ਕਰੀਏ ਉਹ ਵੀ ਹਗ ਮਾਰ ਦੇਣੀ ਕੋਈ ਸਾਡਾ ਵੀ ਕੁਛ ਜੋਜ ਇਸ ਕਰਕੇ ਜਿਹੜਾ ਬਾਹਰ ਹੈ ਜਿਹੜੇ ਬਾਹਰ ਨਿਕਲੇ ਸੁਪਨੇ ਚੋਂ ਜਾਗਰਤਾ ਬਸਾ ਚੋਗੇ ਉਹਨਾਂ ਨੇ ਵਰਪਕਾਰ ਕੀ ਕਰਨ ਜਗਾਉਣ ਦਾ ਸੁਪਨੇ ਦੇ ਵਿੱਚ ਪਖਾਰੀ ਹੈ ਪੂਰਾ ਰਾਜ ਪਰ ਇਹਨੂੰ ਰਾਜਾ ਕੱਲੇ ਕਲੇ ਨੂੰ ਕਿਵੇਂ ਬਣਾ ਦੇਵੇ ਨਾ ਇਹਨਾਂ ਦੀ ਲੜਾਈਆਂ ਰਾਜੇ ਪਰਦੀ ਰਾਜਾ ਬੰਦੂਲੀ ਫਰ ਕੋਈ ਕਹਿੰਦਾ ਮੈਂ ਉਹ ਰਾਜਾ ਹੋ ਹੈ ਉਹ ਰਾਜਾ ਸਭ ਸੁਪਨੇ ਪੇ ਅਗਰੀ ਹੈ। ਰਾਹੀ ਦਾ ਸੱਚੀ ਹੈ। ਪਰ ਜੇ ਜਾਗ ਹੋਵੇ ਤਾਂ ਰਾਜਾ। ਜਿਨਾ ਜੇ ਸੁੱਤੇ ਪਏ ਨੇ ਕੋਈ ਵੀ ਰਾਜਾ ਦੀ। ਉਹਨਾਂ ਦੀ ਬਾਤ ਉਹਨਾਂ ਭੇਲੀ ਹੈ। ਕੁਰਸੀਆ ਡੱਡੇ ਰੱਖੇ ਹੋਏ ਨੇ। ਜਿਹਨੂੰ ਮੜ ਜਾਂਦੀ ਹੈ ਉਹ ਡੰਡੇ ਚੱਕ ਲੈਸਣ ਹੈ। ਆਈ ਕੁਝ ਹੋ ਰਿਹਾ। ਸ਼ਰਧਾ ਚ। ਰਾਜ ਪਿਛੇ ਡੰਡਾ ਚੱਲਦਾ ਉਹ ਕਾਲੇ ਪਿਛੇ ਚੱਲਦਾ। ਪਾਸਾ ਪਿਛੇ ਲੀਏ ਸਨ ਵੇਰਨ ਤੋਂ ਪਰਾਲੀ ਇੱਕ ਭੇਲੀ ਸੱਤੀ ਉਹ ਹੁਣ ਨਾ ਤਾਂ ਫੁੱਟਦੀ ਹੈ ਬੰਦਲ ਤੇ ਨਾ ਢੁੱਟਦੀ ਹੈ ਕੁਝ ਆਕੇ ਭਜਦਾ ਉਹਨੂੰ ਤੇ ਕਾਹਤ ਨੂੰ ਉਹ ਦੂਏ ਡੰਡੇ ਸਰੇ ਛੋਟੇ ਛੋਟੇ ਡੰਡੇ ਚਾਹਤੋਂ ਉਪੜਦੇ ਨੇ ਜਾਏਗਾ ਕਿਤੇ ਭੇਲੀ ਲੈ ਕੇ ਇਹ 500 ਭੇਲੀ ਹੈ ਜਲਦ ਬਹਲਾ ਰਾਜ ਇਹ ਧਰ ਕੇ ਛੱਡੇ ਜਿੰਨਾ ਡੰਡੇ ਖਾਣੇ ਨੇ ਰਵਾਜ ਨੂੰ ਤੇ ਲੱਗਿਆ ਰਹੇ ਇਹਦੇ ਵਿੱਚ ਜਗਰਾ ਜਗਰਾ ਨੂੰ ਮੋਹ ਪਰ ਜਗਰਾ ਰਹਿਣਾ ਕੋਉ ਕੋ ਇਹ ਰਾਜ ਬਹਲਾ ਝਗੜੇ ਦੀ ਜਲ ਰਿਹਾ ਰੂਹ ਕੋ ਰਾਮ ਜੀ ਜੇ ਤਾਂ ਕੋਈ ਵਧੀਆ ਸਮਾਂ ਦੀ ਆ ਸਕਦਾ ਰਾਮਚੰਦ ਜਦ ਅੱਜ ਦੀ ਟ੍ਰੇਨ ਹੈ ਰਾਮ ਰਾਜ ਪ੍ਰੇਮ ਭਕਤੀ ਹੈ ਪ੍ਰੇਮ ਭਕਤੀ ਕੁਰਬਾਨੀ ਹੈ ਗੁਰਬਾਣੀ ਤੇ RAM RAJ ਤੋਂ ਰਮਾਂ ਤੋਂ ਵਧੀਆ ਕੋਈ ਤੁਸੀਂ ਨਹੀਂ ਐਸੇ ਬਣਾ ਸਕਦੇ ਆ ਬਣਾ ਸਕਦੇ ਫਿਚਰ ਲਿਖ ਸਕਦੇ ਨੋਵਲ ਨਹੀਂ ਲਿਖ ਸਕਦੇ ਤੋਂ ਵਧੀਆ ਕੋਈ ਇਹਦੇ ਵਿੱਚ ਬ੍ਰਹਮ ਗਿਆਨ ਦੇ ਜਿਹਨੂੰ ਪ੍ਰੇਰਣ ਪੁਸਤੀ ਕਹਿੰਦੇ ਬਾਪ ਦਾ ਹੁਕਮ ਮੰਨ ਛੱਡ ਗਿਆ ਰਾਜਾ ਜੜ ਗਿਆ ਉਹ ਵੀ ਪ੍ਰੇਮ ਸੀ ਇੱਜੇ ਤਰ੍ਹਾਂ ਜੀਵਾਂ ਪਾਪਿਕ ਪ੍ਰੇਮ ਦੀ ਛਾਲ ਮਾਰ ਕੇ ਮਰ ਗਿਆ ਬਰਨ ਦਾ ਪ੍ਰੇਮ ਸੀ ਮਜਬੂਰੀ ਸੀ ਬਿਆਸ ਤੇ ਬੈਠੇ ਬਚਨ ਤੇ ਬੈਠੇ ਫਿਰ ਪਰਸੋਂ ਜਿਹਨ ਮੌਰਾ ਜਦ ਮਗਰ ਭਾਈ ਦਾ ਕਰਦਾ ਦੀ ਲਾਸ਼ ਨੂੰ ਉਹੀ ਸੀ ਕਹਿਣਾ ਰਹਿਣੀ ਦੀ ਤੱਕ ਉਹ ਤਾਂ ਨਾ ਨਵੀਂ ਜਨ ਉਹੀ ਪ੍ਰੇਮ ਸੀ ਦੂਈ ਮਾ ਦਾ ਮਾਚਦਾ ਦੀ ਨੇ ਉਹੀ ਪ੍ਰੇਮ ਪਟਕਾ ਨਾ ਮ ਰਾਜੇ ਨਿਕਾ ਨੂੰ ਮਹਾਦੇਵੀ ਲੱਤ ਮਾਰੀ ਦੱਸਦੇ ਨੇ ਵੈਦੂ ਦੀ ਦਾਖਲਾ ਵੈਦੂ ਦਾਖਲਾ ਕੋਈ ਆਏ ਗੜੇ ਉਡੀ ਲੱਗੀ ਸੀ ਉਹ ਵੀ ਪ੍ਰੇਮ ਹੈ ਨਫਰਤ ਕਿਥੇ ਕਿਥੇ ਵੀ ਨਫਰਤ ਕਿੱ데 ਹੀ ਫੇਰੋ ਭਰਤ ਆ ਗਿਆ ਖੜਾ ਮਾਰਾ ਤੇ ਰਾਜ ਕਰਦਾ ਰਿਹਾ ਉਹ ਵੀ ਬਰੇ ਇਹ ਰਾਮ ਦੀ ਕਹਾਣੀ ਤਾਂ ਗਏ ਜਾਣੀ ਜਾਣੀ ਵੇ ਰਾਜਾ ਰਾਮ ਦੀ ਕਹਾਣੀ ਇਹ ਰਾਜਾ ਰਾਮ ਦੀ ਕਹਾਣੀ ਹੈ ਉਹ ਰਾਜਾ ਰਾਮ ਦੀ ਕਹਾਣੀ ਬਣਾਈਦਾ ਹੈ ਦੇ ਤੇ ਪਰ ਬਣੀ ਜੀ ਇਹ ਜੋ ਬਣੂਏ ਤਾਂ ਵਧੀਆ ਬਣ ਨਹੀਂ ਸਕਦੀ ਵਧੀਆ ਹੋਰ ਕੀ ਬਣੂਗਾ ਕੋਈ ਇਹਦਾ ਫੇਦੀ ਦੀ ਕੋਈ ਕਿਤੇ ਕੁਛ ਨਹੀਂ ਉਹ ਤਾਂ ਭੀੜਣੀ ਉਹ ਫਿਰੇਵੇਂ ਪਿੰਨਨਾ ਦਿਖਾਉ ਉਹ ਫਿਰੇਵੇਂ ਸਾਰਾ ਪ੍ਰਸੰਗ ਹੋ ਗਈ ਉਹ ਤਾਂ ਸੀਤਾ ਚਾਹੇ ਉਹ ਕਿਤੇ ਚਲੇ ਗਈ ਉਹਦਾ ਵੀ ਪ੍ਰੇਮ ਦਿਖਾਇਆ ਉਹ ਕਹਿਆ ਜੀ ਸਾਰਾ ਕੁਛ ਤਾਂ ਨਹੀਂ ਅੱਛਾ ਹੱਜਗਾ ਯਾ ਫਿਰ ਦੇਖੀਏ ਸਿਰ ਉਹ ਪ੍ਰੇਮਾ ਤੋਂ ਸੀਤੇ ਦੇ ਲਈ ਆ ਗੱਲ ਵੈਸੇ ਪਰ ਪੂਰੀ ਨਹੀਂ ਵਰਦੀ ਹੁੰਦੀ ਮਾਇਆ 'ਚ ਮ ਫਰਮਾ ਰਾਵਣ ਆਟਾ ਬਣਾਤਾ ਦੁਆ ਜਿੱਤਾ ਲੱਗ ਨੂੰ ਆਟਾ ਬਲੂੜੀ ਪਾਈ ਹੋਣੋ ਤਾ ਪਰ ਫਰਮਤੋ ਦੇ ਵਿੱਚ ਵਾਢੀ ਸਕਦਾ ਆਕੇ ਉਹ ਨਹੀਂ ਸੀ ਹੋਇਆ ਤਾਂ ਫਰਪਕਾਰ ਤੋਂ ਬਾਅਦ ਸਿਮਣ ਰੁਕ ਜਾਂਦਾ ਆਪਕਾ ਰੇਕਾ ਕੱਲੇ ਨਹੀਂ ਜੇ ਸਿਮਣ ਜਾਦੋਦਾ ਜਾਂ ਜਾਪਰਤਾ ਪੂਰਾ ਹੋਏਗਾ ਜਾਪ ਦਾ ਪੂਰਾ ਹੋਵੇ ਸੁਧੋ ਹੋ ਗਿਆ ਕੁਰ ਸਭੂ ਨਾਲਾ ਕੌਣ ਹੈ ਪਰਪਕਾਰੀ ਕਾਹ ਹੈ ਉਹਨਾਂ ਜਰ ਪਰਪਕਾਰ ਹੋਈ ਨਹੀਂ ਜਿੰਨਾ ਜਰਾ ਆਪ ਸੋਕੀ ਆਪਣਾ ਮਨ ਕਬੂਦਿ ਉਹ ਆਉਗਾ ਸਭ ਕੁਝ ਕਦੀ ਕਦੀ ਪਰਪਕਾਰੀ ਪ੍ਰਭ ਕੋ ਸਿੰਮਰੇ ਪਰਪਕਾਰੀ ਸਿਰਫ ਪ੍ਰਭ ਨੂੰ ਸਬੂਡ ਵਾਲਾ ਹੀ ਹੋ ਸਕਦਾ ਹੋਰ ਕੋਈ ਪਰਪਕਾਰੀ ਨਹੀਂ ਹੋ ਸਕਦਾ ਚਾਹੋ ਆਪਣੇ ਆਪ ਨੂੰ ਪਰਪਕਾਰੀ ਬੁੱਧੇ ਨਾਮ ਤੇ ਅਗਲਾ ਲੱਗਦਾ ਪਰ ਜਿਹੜੇ ਅਸੀਂ ਪਰਪਕਾਰ ਦਾ ਪ੍ਰਚਾਰ ਕਰ ਰਹੇ ਨਾ ਕਰਦੇ ਰਹੇ ਹਾਂ ਉਸ ਵੇਲੇ ਕਰ ਰਹੇ ਸੀ ਉਹਨਾਂ ਦੇ ਖਰਾਬ ਪੋਜੀਸ਼ਨ ਲਗਾ ਲਿਆ ਕੁਝ ਹਰੇਕ ਆਇਤਾ ਜੀ ਪਰਪਕਾਰ ਕਰਦੇ ਕਿਹੜਾ ਸੱਤ ਨਹੀਂ ਕਰ ਪਰਪਕਾਰ ਕਰਦੇ ਆ ਬਈ ਦਾ ਕੱਬ ਛੋਟੇ ਕਮਾਨੋਂ ਪਰਪਕਾਰ ਦਾ ਕੱਬ ਜਿਹ ਹੋਇਆ ਤਾਂ ਗੁਰਾਂਤ ਕਰਨ ਟੇਪੜੀ ਜੀਤੀ ਕਿ ਦਇਆ ਜਾਣੇ ਜੀ ਕੀ ਕੁਛ ਕੁਦਾਨ ਜੀਵ ਦੇ ਉੱਤੇ ਦੇ ਆਖਰਕਿ ਜੀ ਵਾਸਤੇ ਕੁਪਰਨਾਨ ਕਰੇ ਜਿਹੜਾ ਜੀਏ ਜਾਲ ਚੋਂ ਛੁੱਟ ਕੇ ਚਲੇ ਜਾਵੇ ਆਗੰਤਾਂ ਕਰਕੇ ਬਾਹਰ ਨਿਕਲ ਜੁਵੇ। ਇਹ ਪਰਪਕਾਰ ਕਿ ਤੋ ਘਟਦੀ। ਫਿਰ ਜਨ ਪਰਵਕਾਰੀ ਆਏ ਜੀ দান ਦੇ ਭਗਤੀ ਲਾਇਓ ਨੂੰ ਹਰਿ ਸੋ ਨਾਮ ਨੂੰ ਲਾਇਓ ਇਹ ਪਰਪਕਾਰ। ਉਤੇ ਪਰਵਕਾਰੀ ਹੈ ਜਨ ਪਰਵਕਾਰੀ ਹੈ ਅਲੰਕ ਸਾਹਿਬ ਦਾ ਇੱਥੇ ਪਰਪਕਾਰ ਬਚਿਆ ਹੋਇਆ ਰੱਬ ਦਾ ਸਿਮਰਨ ਪਰਉਪਕਾਰੀ ਰੱਬ ਨੂੰ ਸਿਮਰਨ ਦੇ ਪਰਉਪਕਾਰੀ ਉਹ ਪਰਮ ਕੋ ਜਿਹੜੇ ਸਿਮਰਨ ਵਾਲੇ ਨੇ ਉਹੀ ਪਰਉਪਕਾਰੀ ਨੇ ਪਰਉਪਕਾਰ ਕਰ ਸਕਦੇ ਨੇ ਕਿਸੇ ਦੀ ਮਦਦ ਕਰ ਫਿਜ਼ੀਕਲ ਮਤਲਬ ਆ ਆਰਥਿਕ ਹੋਰ ਕੁਝ ਕਰ ਦੇਣਾ ਕਬ ਠੀਕ ਨੇ ਲੇਕਿਨ ਪਰਉਪਕਾਰ ਦੀ ਹੈ ਇਹ ਤਾਂ ਕਹਿ ਸਕਦੇ ਆ ਪਰ ਮਤਲਬ ਪਰਉਪਕਾਰ ਜੋ ਵੱਡੀ ਚੀਜ਼ ਹੈ ਉਹ ਲਾਭ ਪਰਪਕਾਰ ਫਿਰ ਜੇ ਆਪਾਂ ਧੀਮਾ ਲੈ ਆਂਦਾ ਪਰਪਕਾਰ ਖਦਵਾਉਂਦੀ ਗੋ। ਯਾਨੀ ਸਾਨੂੰ ਪਤਾ ਰਹੇ ਕਿ ਪਰਪਕਾਰ ਕੀ ਹੋਇਆ ਇੱਕ ਸਵਾਲ ਰਹਿਣਾ ਚਾਹੀਦਾ ਜਿੰਨਾ ਚਿਰ ਕੋਈ ਪਰਪਕਾਰੀ ਪੈਦਾ ਨਹੀਂ ਹੁੰਦਾ। ਪਰਪਕਾਰੀ ਕੋਈ ਆਪਣਾ ਬਨੁੰਡੀ ਮੰਦਾ ਤਾਂ ਪਰਪਕਾਰ ਵੀ ਅਸੀਂ ਨਹੀਂ ਮੰਨਦੇ ਜਮਲ ਕਰ ਰਹੇ ਹਾਂ ਪਰਪਕਾਰ ਹੈ। ਛੋਟੇ ਬੱਚਿਆਂ ਗਰੀਬਾਂ ਨੂੰ ਕਿਤਾਬਾਂ ਦੇ ਪਰਪਕਾਰ ਨਹੀਂ ਹੈ। ਇਨ ਤਰ੍ਹਾਂ ਕਰ ਜਮਾ ਕਦੋਂ ਹੋ ਸਕਦਾ ਕੋ ਡੈਫੀਨੇਸ਼ਨ ਹੋ ਪਰਉਪਕਾਰ ਦੀ ਕੋ ਡੈਫੀਨੇਸ਼ਨ ਨਹੀਂ ਆਇਆ ਦੇ ਤੋਂ ਜੀਵਨ ਦੇ ਤਬਦੀਲਾ ਹਸਨ ਲੈਣ ਕੋ ਲਈ ਜਾਂ ਪਰਉਪਕਾਰੀ ਆਏ ਕਿ ਕਿਤਾਬ ਜੀਵਨ ਦੇ ਜੀਵਨ ਦਾ ਦਿੱਤਾ ਜੀਵਨ ਬਣਾਇਆ ਮਿਲਿਆ ਹੁਣ ਦੀ ਤੂੰ ਕਰਦਾ ਆਦਿ ਕਾਲ ਹੈ ਆਪਣਾ ਨਾ ਫੇਰਦੀ ਮਰਦਾ ਹੀ ਉਤੇ ਦਾ ਫੋੜ ਨਹੀਂ ਸਕਦਾ ਜੀਵਨ ਦਾੰਦ ਦੀ ਸਿੱਖਿਆ ਹੀ ਦਿੱਤੀ ਆ ਹੋਰ ਕਾਲਾ ਦਾ ਦਵਾਈਏ ਕੋਈ ਹੋਣੀ ਜੇ ਤੀਂੂ ਚਾਲਾ ਜੀ ਦਾਮ ਦੇ ਭਗਤੀ ਲਾਇਨ ਭਗਤੀ ਲਾਇਆ ਭਗਤੀ ਕਰਨੀ ਦਾ ਉਹ ਨਹੀਂ ਉਹ ਤੱਲਾਇਆ ਹੀ ਲੈ ਹਰ ਲੈਣ ਬੁੱਝਾ ਪ੍ਰਭੂ ਸਿਮਰਨ ਸੇ ਪਰਬ ਕੋ ਹੋ ਗਿਆ ਉਹ ਚਲੂ ਯਾਦ ਹੈ ਫਿਰ ਤੋਂ ਆ ਗਿਆ ਜਿਹੜਾ ਟੁੱਟਿਆ ਰਹਿ ਗਿਆ ਉੱਥੇ ਰਹਿ ਗਿਆ ਲੈਣ ਬੁਲਾਇਆ ਕਿਉਂ ਕਿਹਾ ਦੇਣ ਬੁਲਾਇਆ ਕਿਉਂ ਕਿਹਾ ਲੈਣ ਬੁਲਾਇਆ ਪ੍ਰੋਫੈਸ ਸਵਾਲ ਹੈ ਲੈਣ ਬੁਲਾਇਆ ਕਿ ਦੇਣ ਬੁਲਾਇਆ ਕਿਉਂ ਕਿਹਾ ਉਹ ਆਖਦੇ ਨੇ ਕਿ ਇਹ ਮਨ ਲਾਏ ਹੋਣਾ ਜਾਈਦਾ ਸੀ ਸਾਡੀ ਪੁਲੀ ਦੇ ਹਿਸਾਬ ਨਾਲ ਦੇਣ ਮਲਾਏ ਪਹੇ ਹੀ ਰਿਹਾ 100 ਲੈਣ ਵਾਲਾ ਮਹਿਬੂਬ ਲੈਂਪ ਲਾਇਆ ਕਿਉਂਕਿ ਹਾਂ ਹਰੇ ਕੋਈ ਘਟ ਕੱਢ ਹਰ ਜੂ ਬਸ ਹਰਦਾ ਉਹਦੇ ਦੀ ਕਹੀ ਹੈ ਆਪ ਮਿਲੇ ਆ ਤਾਂ ਲੈਣ ਮਿਲਾਏ ਕਹਿੰਦੇ ਆਪਾਂ ਨੂੰ ਮਿਲੇ ਹੀ ਆ ਆਪਣੇ ਨਾਲ ਮਰੋ ਟੁੱਟ ਗਿਆ ਹਰ ਸੰਗ ਨਾਲ ਦੇ ਵਿੱਚ ਕਿਧਰੇ ਆ ਚਲਿਆ ਗਿਆ ਦੂਆ ਉਹਦੇ ਨੂੰ ਮੜਾ ਰਿਹਾ ਸੁਬਦਾਂ ਕਹਨ ਬਣਾ ਰਿਹਾ ਆਪਣੇ ਦੋ ਬਣਾ ਰਿਹਾ ਉਹ ਵਈ ਚੱਕ ਪਿਆ ਪਰਫਦਾ ਕਹਲਾ ਉਹ ਕਹਿੰਦੇ ਤੂੰ ਵੀ ਰੁਟ ਜਾ ਫਿਰ ਗਿਆ ਜਦੋਂ ਜਦ ਪੱਥਰ ਦਾ ਰੌਲਾ ਹੋਇਆ ਗਿਆ ਪਿਆਰ ਹੈ ਉਹਦਾ ਜਦੋਂ ਤਾਂ ਪੇ ਢੜਾਇਆ ਲੋ ਪਥਰੇ ਜੀ ਬੇਰਵਾਦੀ ਕੀ ਦੋ ਹੰਮਸ ਜੇ ਜਦ ਜੇਨ ਬੁਲਾਏ ਆਪਾਂ ਲੱਗਦੇ ਜੀ ਬਿਲਕੁਲ ਜੋ ਦੰਦ ਹੋ ਗਿਆ ਹਰ ਦੋ ਹੋਏ ਨੇ ਦੋ ਲੋ ਉਹ ਦੋ ਦੁੱਲੋਲੇ ਦੋ ਉਹ ਸਭ ਦਾ ਇੱਕੋ ਹੀ ਹੈ ਲੋ ਜੋ ਸ਼ੁੱਧ ਭਤਾਰ ਆ ਉਹ ਇੱਕੋ ਹੀ ਆ ਉਹ ਦੋ ਨਹੀਂ ਦੋ ਦੇਰ ਦੇ ਜੇਕਰ ਤੇ ਪ੍ਰਭੂ ਸਮਰੇ ਸੇਪਾਰਪਕਾਰੀ ਤੇ ਇਸੇ ਚੰਨ ਸਭਾਂ ਚੰਨ ਹੋਇਆ ਜੀ ਚੰਨ ਕਤੇ ਇਸੇ ਚੰਨ ਸਭਾਂ ਹੋਏ ਤੇ ਸਿੱਖ ਵਿੱਚ ਰੂਪ ਚ ਚੰਨ ਸਭ ਚ ਉੱਦਦਾ ਇਸ ਕਰਕੇ ਹਰ ਕੋਈ ਰਹਿਣਾ ਹੋਵੇ ਇਹ ਦੋ ਵਾਰ ਹਰ ਹੋਇਆ ਹੋਇਆ ਜਾ ਲੋਗੇ ਤੋਂ ਬਚਿਆ ਹੋਇਆ ਹੈ ਮੇਜਰ ਮੇਜਰ ਪੋਰਸ਼ਨ ਉਹ ਉਹਨਾਂ ਨਾਲ ਕਰਦੇ ਜਿਹੜਾ ਦਾਰ ਹੋਵੇ ਤੋਂ ਬਚਿਆ ਹੋਇਆ ਹੈ ਜਦੋਂ ਹੋਵੇ ਨਾ ਮੇਜਰ ਬੋਲ ਜਮਾਉਣਾ ਚੀਜ਼ ਬਾਹਰ ਕਿਹਾ ਹੋਇਆ ਬਾਕੀ ਹਿੱਸਾ ਜਿਹੜਾ ਹੈਗਾ ਉਹ ਪੋਰਟ ਸੋਧੋ ਸੋਧਿਓ ਕਿ ਤਾਜ਼ੀ ਗਾਦੀਓ ਸੋਧੋ ਪੋਰਟ ਕਾਹਦਾ ਦਿਓ ਉਹ ਤਾਂ ਸਾਫੀ ਗ੍ਰੂਪ ਉਹਦੇ ਤੇ ਬਿਜਤ ਕਿਆ ਹੈ ਜਿਸਕਿ ਮਾਇਆ ਸਰਪ ਉਹ ਸਾਨੂੰ ਹਾਰ ਗਿਆ ਹੋਇਆ ਕੋਈ ਪ੍ਰਭ ਕਿਆ ਹੈ ਉਸੇ ਦਾ ਉਹਨੇ ਸਾਰੇ ਸੁਤਪਤਾਰ ਕੀ ਹੋਈ ਸੁਤਪਤਾਰ ਕੀ ਹੋਈ ਰੱਬ ਕੋ ਸਮਰੇ ਉਹ ਹੈ ਵੀ ਇਹਦਾ ਉਹ ਰੀਡਿੰਗ ਨਹੀਂ ਹੈ ਬਿਮਾਰ ਹੈ ਤਾਂ ਪੂਰਾ ਸਾਬਤ ਸੂਤ ਪਰ ਬਿਮਾਰ ਹੈ ਬਿਮਾਰੀ ਉਹਦੇ ਵਿੱਚ ਨਾ ਨੂੰ ਆ ਰਹੇ ਦੰਦਾ ਮਬਾਤੋ ਚ ਬਸ ਤੂੰ ਬਿਗਾ ਨਾ ਐਸੀ ਵੀ ਗੱਲ ਸੁਝਾਈ ਦੀ ਆ ਜਾਂ ਦੂਰੇ ਪਾਸੇ ਭਾਜ ਜਾਦੇ ਫਿਰ ਇਹ ਕਿਉਂ ਲਿਆਉਂਦੀ ਮਾਇ ਵੀ ਸੁਝਾਈ ਜਾ ਸਕਦੀ ਕਈ ਵਾਰ ਫਿਰ ਸੰਗਣਾ ਪੈਂਦਾ ਕਈ ਵਾਰ ਲਾਈਟ ਚਾਲੂ ਕਰਦਾ ਕਈ ਵਾਰ ਕਿਵੇਂ ਕਈ ਵਾਰ ਕਿੰਨੇ ਹਰ ਜਗ੍ਹਾ ਹੀ ਭਾਜੋ ਮੈਂ ਤੁਸੀਂ ਮਾਇਗਾ ਤੇ ਕਿ ਮਾਇਗਲੇ ਨਹੀਂ ਆਉਂਗਾ ਤੇਰੇ ਨਾਲ ਜਾ ਕੇ ਕਦੋਂ ਰਸਤਾ ਕੱਢੇ ਉਹ ਨਹੀਂ ਨਾ ਬਰੇ ਤਾਂ ਸਾਰਾ ਉੱਪਰ ਨੂੰ ਹੋ ਗਿਆ ਤੋਤੇ ਬਾਹਰ ਨਾ ਚ ਕੋਈ ਨਹੀਂ ਨਾ ਤਾ ਜਾ ਹੀ ਨਹੀਂ ਸਕਦਾ ਹੈਗਾ ਨਹੀਂ ਪ੍ਰਭੂ ਕੋ ਸਿਧਰੇ ਤੇ ਸਤਿਗੁਰੂ ਲਿਖਾ ਤਾ ਪ੍ਰਭੂ ਕੋ ਸਿਧਗੇ ਤਿੰਨ ਸਤਿਗੁਰੂ ਦੇ ਹਰੇ ਸਿਰੇ ਪ੍ਰਭੂ ਸਮਾਦੇ ਉਹ ਆਪ ਬੈਗਣੇ ਮੇਰੇ ਕਿ ਸਾਦੇ ਜੀਵਨ ਦਾ ਸਰਬਲਿਆਰੀਓ ਕਿ ਜੀਵਨ ਨੂੰ ਦੋਹਾਲਦਾ ਸਰਬਲਿਆਰੀ ਕਿਵੇਂ ਹੋ ਜਾਂਦਾ ਹੈ ਇਹੋ ਤਾਂ ਫਰਬਰ ਦੇ ਬੂ ਬਾੜ ਦੇ ਗਣ ਨਹੀਂ ਗੱਲਾਂ ਹੈ ਹਰ ਸੰਪਤੀ ਦੇ ਬੂ ਬਾੜ ਦੇ ਹਰ ਸੰਪਤੀ ਦੇ ਮੂ ਬਾੜ ਦੇ ਗਣ ਜਿੱਥੇ ਪਾਣੀ ਆਇਆ ਹੈ ਤਾਂ ਦਾ ਦਹੀਂ ਹਾਂ ਸਤਿਗੁਰੂ ਜੀ ਤਾਂ ਪਰਮੇਸ਼ਰ ਆ ਗਏ ਸਤਿਗੁਰੂ ਜੀ ਆਪਣੇ ਆਪ ਨੂੰ ਕਹਿ ਰਹੇ ਨੇ ਰੱਬ ਕੋ ਸਿਖਰੇ ਕਹੇ ਕਿ ਦੁਕਾਨ ਨੂੰ ਸਾਜਿ ਕੋਈ ਪਿਆ ਉਹ ਜਿਹੜਾ ਬੰਦਾ ਸਾਜੀ ਹੋਣੀ ਹੈ ਰੱਬ ਕੋ ਸਿਖਰੇ ਸਤਿਗੁਰੂ ਜੀ ਸਤਿਗੁਰੂ ਤੇ ਆ ਰਹੀ ਹੈ ਸੱਚ ਬੋਲਿਆ ਕਹਿਣਾ ਪਿਆ ਲੋਕੋ ਰੱਖੀ ਸਕੈ ਤੇ ਹੋ ਰਹਾਊਗਾ ਉਹ ਫਰੀਦ ਹੋਰ ਕਹਿੰਦਾ ਰਾਮ ਜੀ ਖੁਦਾ ਦੇ ਕੋ ਇਤਨਾ ਕੁਸਰ ਦੇਣ ਪਰ ਪੇਸ਼ ਦੇਣਾ ਪੈ ਗਿਆ ਉਹ ਕਹਿੰਦਾ ਆ ਬੋਲ ਜੇ ਤੂੰ ਬੋਲਣ ਬੁਲਾਉਣ ਵਾਲੇ ਨੇ ਯਾ ਬੋਲ ਤਿੰਨ ਸਾਧੂ ਲੈ ਤੌਨੇ ਕਹਿ ਮੈਂ ਸਾਧੂ ਬਦੇ ਆ ਰਹੀ ਉਹ ਬੋਲਦਾ ਤਾਂ ਇਹ ਆ ਪੁੱਛਤਾ ਇਹ ਕਿਹਾ ਜਦ ਉਹ ਸਾਧੂ ਬਦੇ ਹੈ ਇਹਨੇ ਬੋਲਿਆ ਇਹ ਵੀ ਬਸ ਗਿਆ ਕਹਾ ਲਿਆ ਪਰ ਸਮਝਿਆ ਕਦੇ ਨਹੀਂ ਸਮਝਿਆ ਭੇਦੀ ਤੇਰੇ ਨੇ ਠੀਕ ਹੈ ਕਹਾ ਲਿਆ ਕੀ ਕਹਤਾ ਨਹੀਂ ਪ੍ਰਭ ਕੋ ਸਹੀ ਜਾਂ ਦਾਸ ਦਾ ਕਹਿੰਦਾ ਕਹੀ ਜਾਂ ਦਾਸ ਦਾਸ ਦਾ ਦਾਸ ਆ ਕਹਾ ਰਿਹਾ ਸਾਹ ਗਿਲੇ ਹੋ ਜੀ ਪ੍ਰਭ ਕੋ ਸਵੇਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਵੇਰੇ ਸੇ ਮੁਖ ਸੁਹਾਵੇ ਉਹ ਜਿਹੜੇ ਗੁਰਬਖਸ਼ ਸੁਆਗਰ ਮੁਖਾਰੇ ਥੋੜੇ ਮੁਖਲੇ ਜਿਹੜੇ ਪਰੰਪਰਿ ਸੁਣੇ ਚਲੋ ਪ੍ਰਭ ਤੋਂ ਸਵੇਰੇ ਜੇ ਤੈਨ ਸੁੱਖ ਵੀ ਹਾਵੇ ਆਹ ਉਹ ਆਦੀ ਸੁੱਖ ਤੇ ਆ ਹਰ ਕੜੀ ਬਿਹਾਵੇ ਬੀਤਦੀ ਹੈ ਬੇ ਹਮ ਨੂੰ ਬੀਤਣਾ ਦੀ ساری ਜ਼ਿੰਦਗੀ ਲਗਾਤਾਰ ਸੁੱਖ ਤੇ ਬੀਤਦੀ ਹੈ ਤਾਂ ਇਹ ਦੁੱਖ ਲੋਕਾਂ ਨੂੰ ਲੱਗਦਾ ਤਾਂ ਉਹਨੂੰ ਵੀ ਲੱਗਦਾ ਹੁੰਦਾ ਜੋ ਨਾਲ ਦੁੱਖ ਨੂੰ ਕੋਈ ਮੰਨਦਾ ਸੋ ਕਿਸੇ ਨਾਲ ਕੋਈ ਜਾਈ ਜਾ ਕੇ ਪੰਜਨ ਮਾਰਤੀ ਬੋਲੇ ਉਹਦੇ ਅੰਦਰ ਉਹ ਦੁੱਖ ਨੂੰ ਦੁੱਖ ਮੰਨ ਸਕਦੇ ਹਾਂ ਤਾਂ ਉਹ ਜਾਣੇ ਲੋ ਲੱਗਦਾ ਉਹ ਤਿੱਬੂ ਤੇ ਬੈਠਾ ਸਾਡੇ ਹਿਸਾਬ ਨਾਲ ਦੁੱਖ ਹੈਗਾ ਜੇ ਸਾਥ ਬੈਠਣਾ ਪਵੇ ਆ ਕੋਈ ਜੇਲ੍ਹ ਚੋ ਗਿਆ ਕਿਤੇ ਹੋਵੇ ਪਰ ਉਹ ਦੀ ਵਸਤ ਬੰਨਣ ਵਾਲੇ ਨੇ ਤੇ ਦੁੱਖ ਬਰਕੀ ਕਰਦਾ ਬਰਕੀ ਕਰਦਾ ਦੁੱਖ ਯਾ ਕਿਦੇ ਵੀ ਤੇ ਰੰਗ ਫਟ ਮਾਰਦੇ ਨੇ ਖਾਦੇ ਵੀ ਦੇ ਦੁੱਖ ਉਹਦੇ ਵੀ ਨਹੀਂ ਪਤਾ ਕਿ ਖੂਦ ਨੇ ਉਹਦਾ ਬਾਹਾਂ ਟੁੱਟ ਕੇ ਤੇ ਪੰਦੀ ਉਹਦੇ ਵੱਢ ਕੇ ਫਿਰ ਵੀ ਕੋਈ ਜਾਸ ਤੋਂ ਪਤਾ ਹੀ ਨਹੀਂ ਹੁੰਦਾ ਅਵਸਥਾ ਹੁੰਦੀ ਵਾਲਾ ਉਹ ਖੂਦ ਉਹਨਾਂ ਵਾਲਾ ਲੜਦੇ ਵਾਲੇ ਦੇਖਣ ਵਾਲੇ ਕਬਦੇ ਉਹਨੂੰ ਪਤਾ ਹੀ ਨਹੀਂ ਪਤਾ ਬਾਅਦ ਚ ਪਤਾ ਲੱਗਦਾ ਹੁੰਦਾ ਹੋਏ ਤੇ ਹੂਲ ਪਰਬੋ ਸਿਮਰੇ ਤੈਨੂੰ ਆਤਮ ਜੀਤਾ ਇੱਥੇ ਆ ਗਈ ਕੁੜੀ ਫੋਲੀ ਜੀ ਪਰਬੋ ਸਿਮਰੇ ਤੈਨੂੰ ਆਤਮ ਜੀਤਾ ਮੁੰਜ ਜਿੱਤੇ ਆ ਗਿਆ ਤਾਂ ਸੇਬੜਾ ਹੁੰਦਾ ਮੁੰਜ ਜਿੱਤੇ ਤੋਂ ਬਾਅਦ ਸਾਨੂੰ ਨਾ ਪਹਿਲਾਂ ਨਹੀਂ ਹੋ ਸਕਦਾ ਇਹ ਅੰਕ ਜੇ ਕੁੜੇ ਵਾਲੇ ਘੁਪੜਾ ਦੂੰ ਸਾਰੀ ਬੋਤੀ ਬੰਦ ਹੋ ਜੂਦੀ ਰੇਗਦੀ ਚੌੜੀ ਜਾਂਦਾ ਲੈ ਕੇ ਭੇਗੇ ਸਤਿ ਸਾਰੇ ਬੋਲਦੇ ਵੀ ਬੋਲੀਂ ਵੀ ਹੋ ਜਾਂ ਥੋੜਾ ਲਾ ਦੇ ਕੋਈ ਜੋ ਆਤਮ ਜਿੱਤ ਰਿਆ ਜੀ ਉਹਦਾ ਸਭਨ ਨਾ ਥੋੜਾ ਸਭਨ ਹੋਈ ਪਹਿਲਾਂ ਦੱਸੋ ਫਿਰ ਪੜਤਾਂ ਤੁਸੀਂ ਪ੍ਰਭੂ ਸਿਮਰੇ ਤਿੰਨ ਆਤਮ ਜਿੱਤਾ ਇਹਨੇ ਪ੍ਰਭੂ ਸਭਨ ਲਿਆ ਉਹਨੇ ਆਤਮ ਜਿੱਤ ਲਿਆ ਉਹ ਜਿੱਤ ਸਭਨ ਤਾਂ ਇਹ ਫੇਰ ਜਿੱਤ ਆਤਮ ਜਿੱਤ ਲਿਆ ਇਹ ਕਹੋ ਰਾਪ ਕੋ ਸਬੁਰੇ ਰਾਉ ਉਹ ਸਬੁਰੇ ਜਿਹਨਾਂ ਨੇ ਆਤਮ ਜੇਤ ਲਿਆ ਉਹ ਸਬੁਰੇ ਨੇ ਸਭਰ ਬੈਦੀ ਹਾਂ ਪਹਿਲਾਂ ਤਾਂ ਮਾਇਆ ਦਾ ਇਹ ਤਾਂ ਲੱਗੂ ਸਾਚੇ ਨਾਮ ਕੀ ਜਦ ਭੁੱਖ ਲੱਗਦੀ ਹੈ ਨਾ ਫਿਰ ਸਿਮਣਾ ਉਹ ਇੱਕ ਤਮ ਆਇਆ ਸੀ ਭੁੱਖਾ ਸਾਡੂ ਪਹਿਲਾਂ ਨਾ ਕ੍ਰਿਸ਼ਨਾ ਦੇ ਤੀਲ ਨੇ ਫਿਰ ਸਾਚੇ ਨਾਮ ਕੀ ਜਦ ਭੁੱਖ ਲੱਗਦੀ ਹੈ ਫਿਰ ਉਹ ਸਬੁਰੇ ਉਹਦਾ ਹੀ ਹਾਂ ਉਹਦੇ ਨੂੰ ਖਲਾਲ ਆਜ ਕਰ ਦੇ ਨਾਮ ਨਹੀਂ ਆ ਜਾ ਮੜਿਆ ਇਹ ਸਗੂ ਤੋਂ ਉਹ ਨਾਮ ਬਾਸ ਕੇ ਸਬਲਣਾ ਇਹ ਪ੍ਰਭੂ ਗਿਆਨ ਹੈ ਮੜਿਆ ਗਿਆਨ ਸਮਝ ਆ ਨਾਮ ਮਿਲਦਾ ਨਾਲ ਦੀ ਨਾਲ ਉਹ ਵੀ ਮਿਲਦਾ ਨਾਲ ਦੀ ਨਾਲ ਥੋੜਾ ਤੋਂ ਬਦਲ ਹੈ ਜਿਹੜਾ ਪਰਬ ਕੋ ਸਿਮਰੇ ਤੈਨ ਨਿਰਮਲ ਰੀਤ ਪਰਬ ਕੋ ਸਿਬਰੈ ਤੈਨ ਨਿਰਮਲ ਰੀਤ ਰੀਤਾਂ ਉਹਨਾਂ ਦਾ ਜਿਹੜੀ ਰੀਤ ਹੈ ਉਹਨਾਂ ਦਾ ਜਿਹੜਾ ਪਤਲਵਾ ਪਰਤੋ ਨਾਲ ਉਹ ਨਿਰਮਲ ਹੁੰਦੀ ਹੈ ਉਹ ਜੀ ਮਿਲਤਰੀ ਕੋਈ ਕੱਪੜਾ ਰੱਖ ਤੇ ਲੀਕ ਰਹੇ ਉਹਨਾਂ ਸਿੱਧੇ ਗੱਲ ਨਹੀਂ ਠੀਕ ਹੈ ਜੀ ਸਪੈਸਟ ਬਕਤਾਂ ਹੁੰਦੇ ਰਹੋ ਸਪਸ਼ਟ ਗੱਲ ਕਰਨ ਵਾਲੇ ਇਹ ਨਹੀਂ ਹੈਗਾ ਵੀ ਹਮ ਆਪਾਂ ਕਿਸੇ ਦਾ ਲਿਹਾਜ਼ ਕਰੀਏ ਵੀ ਚਲਿਆ ਅੱਜ ਆਪਣਾ ਬੰਦਾ ਸੰਤ ਦਾ ਹੈਗਾ ਇਹ ਜਾਂ ਆਪਾਂ ਇਹ ਅਰਥ ਕਾਹੂ ਕਰ ਲੈਣੇ ਕੋਈ ਸੰਤ ਗੁੱਸੇ ਹੋ ਜਾਣਗੇ ਆਪਣੇ ਨਾਲ ਇਹਦਾ ਉਹ ਮੁਸ਼ਕਲ ਹੁੰਦਾ ਕਮਾਰ ਜਦ ਕੋਈ ਚੀਜ਼ ਬਣਾਉਣਾ ਹੈ ਕਲਾ ਕੋੜਾ ਬੋਰ ਨਹੀਂ ਬਣਾਉਂਦਾ ਪੈ ਜਾਵੇ ਤਾਂ ਲੱਗਦਾ ਬਿਲਕੁਲ ਜਿਦਾ ਹੋ ਜਵੇ ਪਰ ਉਹ ਕਦੋਂ ਆਪਣਾ ਨੂੰ ਬਹੁਤ ਬਹੁਤ ਵਧੀਆ ਬਣਾਉਂਦਾ। ਨਾ ਉਹ ਬਣਾ ਰਿਹਾ ਕੁਝ ਇਹ ਕਰ ਰਿਹਾ। ਉਹ ਤਾਂ ਆਪਣੀਆਂ ਨੇ ਵਧੀਆ ਹੀ ਕਰੂ ਜੇ। ਇਹ ਕੁਝ ਨਹੀਂ ਗੱਲ। ਉਹ ਹੋ ਜਵੇ ਬੋਲਦੇ ਬੋਲਦੇ ਤੇ ਕਿਤੇ ਸਾਡੇ ਚ ਕਮੀ ਰਹਿ ਗਈ ਉਹ ਲੱਗ ਆਲਾ। ਵਸੋ ਕੋਈ ਨਹੀਂ ਘਟਦਾ। ਕਰਨ ਲੱਗੇ। ਉਹ ਜੇ ਕਥਾ ਨਾ ਨਾ ਕਿਏ ਫਿਰ ਉਹ। ਤਾਂ ਹਜਰ ਨਹੀਂ। ਉਹ ਜੇ ਆਪਣੇ ਗੁਰਪ੍ਰੀਤ ਕਰਦਾ। ਇਹ ਜਾਨਵਰ ਜਿਹੇ ਵਿੱਚ ਰੱਖਣ ਲੱਗ ਜਵੇ ਫਿਰ ਉੱਤੇ ਜਾਂਦੀ ਉਹ ਉੱਤੇ ਫੜਦਾ ਹੀ ਦੀ ਹਾਇ ਨਾ ਇਹ ਫੜਾ ਹੋ ਜਾਂਦਾ ਕਾਣੀ ਹੋ ਸਿਮਰੇ ਤਿਨ ਅਨੰਦ ਕਨੇਰੇ ਪ੍ਰਭੂ ਸਿਮਰੇ ਤਿਨ ਅਨੁਦ ਕਨੇਰੇ ਪਰਮ ਅਨੁਦ ਕਨੇਰੇ ਪਰਮ ਅਨੁਦ ਇਹ ਭਟਾ ਲੋ ਦੋਸਾ ਬਾਣੀ ਦੀ ਦੋ ਇਹ ਅਨੰਦ ਕਨੇਰੇ ਅਗਲੀ ਸਟੇਜ ਹਾ ਕੋਡ ਤੁਹਾਨੂੰ ਦਤੇ ਤੇ ਅਹ ਆ ਗਾ ਸੋਦਸਵਾਦ ਅਨਹਤ ਨਾਦ ਕਹਿਣਾ ਚਾਹੀਏ ਅਸਿਆਜਿਵ ਸਮਾ ਰਹੇ ਜਿੱਤੇ ਕੋਡ ਅਨੁਭਵ ਵੀ ਹੈ ਚਾਹੇ ਅਹ ਤੁਹਾਨੂੰ ਕੋੜਾ ਨੁਦਾ ਕੋੜਾ ਨੁਦਾ ਤੇ ਕੋੜਾ ਨੁਦਾ ਉਹ ਰੁੜ ਗਦੇ ਨਹੀਂ ਉਹ ਪ੍ਰਭ ਕੋ ਸਿਮਰੇ ਬਸੇ ਹਰ ਮੇਰੇ ਆਦੇ ਪ੍ਰਭ ਕੋ ਸਿਮਰੇ ਬਸੇ ਹਰ ਮੇਰੇ ਬਸੇ ਹਾਤੇ ਢੇਡੇ ਦੇ ਉਹਦੇ ਅਗਿਆ ਦੀ ਬਸਨ ਵੀ ਨੇੜੇ ਬਸੂ ਸੰਪੇੜੇ ਬਾਜੇ ਬਿਲਕੁਲ ਉਹਦੇ ਰੇਂਦੇ ਬੀਚੇ ਉਹਦੇ ਬੀਚੇ ਕਹਿਆ ਨੇ ਉਹ ਸੰਤ ਕਿਰਪਾ ਦੇ ਅੰਦਰ ਜਾਗ ਨਾਮਿਕ ਸਿਮਰਨ ਪੂਰੇ ਭਾਗ ਸੰਤ ਕਿਰਪਾ ਜਾਗਣਾ ਹੁੰਦਾ ਕਿ ਉਹ ਜਾਗਣਾ ਆਨੰਦ ਹੁੰਦੇ ਨੇ ਉਹ ਪਰਕਾਰ ਹੁੰਦਾ ਹੈ ਕਰਦਾ ਉਹ ਤਾਂ ਉਹਦੇ ਲਖੀ ਪਸੰਦ ਹੈ ਨਾ ਚਮਨ ਵਾਲੇ ਦੇ ਜੋ ਸਮਰਾ ਰਿਹਾ ਸਿਮਲ ਕਰਵਾ ਰਿਹਾ ਚਮਨ ਕਰਨ ਵਾਲਾ ਇਸ ਨੂੰ ਕਰਵਾਊਗਾ ਜਪਿਆ ਉਹੀ ਆਪ ਜਪਿਆ ਦੇ ਬਾਬਾ ਜੀ ਸਿਮਲ ਦੇ ਕਹ ਲੋ ਕੋਈ ਗੱਲ ਆ ਉੱਥੇ ਜਨਤ ਕਰਨੇ ਦੇ ਨੇ ਉੱਥੇ ਹੀ ਬਸ ਇਹ ਮੇਲੇ ਪਰ ਜਿਹੜੇ ਦੂਜੇ ਨੇ ਹਾਲ ਦੇ ਉਹਨਾਂ ਨੂੰ ਇਹ ਬੰਤੀ ਹੈ ਕਹੋ ਸੰਤ ਕਿਰਪਾ ਦੇ ਅੰਦਰ ਜਾ ਲਓ ਉਹ ਨਾਨਕ ਕ੍ਰਿਸ਼ਨਾ ਜਿਵਰਨ ਪੂਰੇ ਭਾਲ ਹੁਣ ਤੇ ਕਿਰਪਾ ਤੇ ਅੰਦਰ ਜਾਗੇ ਹੁਣ ਕੋਈ ਸੰਤ ਦੇ ਵਿੱਚ ਜੇ ਸੁਵੇ ਵਾਲੇ ਰਹਿ ਜਾਣੀ ਜੀ ਗੁਰਬਾਨੀ ਅਸੀਂ ਵਕਤ ਕਿਰਪਾ ਦੇ ਨਾ ਜਾਗਣਾ ਨਹੀਂ ਹੈ ਸਾਡਾ ਆਪਣੇ ਅੰਦਰ ਆਇਆ ਉਹਦੀ ਖੁਸ਼ੀ ਅਰਜਾ ਕਰਨਾ ਜੇ ਉਹਦੀ ਖੁਸ਼ ਕਰ ਲਾਂਗੇ ਉਹਦੀ ਕਿਰਪਾ ਹੁ ਤਾਂ ਜਾਗੂਗੀ ਉਹ ਖੁਦ ਕਦਹੁ ਕਿਵੇਂ ਹੋ ਸਵਾਲ ਹੁਣ ਇਹ ਆ ਗਿਆ ਉਹ ਕਿਰਪਾ ਕਰੇ ਕਿਵੇਂ ਉਹ ਕਿਰਪਾ ਕਦਵੇਂ ਹੋਵੇ ਉਹ ਮੀਰ ਤੇ ਭਾਂਵੇਂ ਜੇ ਸੁੱਤਰ ਆਸੂ ਦੀ ਉਹ ਆਏ ਜੇ ਤੁਸੀਂ ਸਾਰੇ ਕੰਬ ਰਹੇ ਹੋ ਉਹ ਨਾਲ ਕਰੋ ਆਤਮੰਗੀ ਵਾਹ ਕੇ ਕਹਦਾ ਦੇਸ਼ ਘਾੜੀ ਉਹ ਖੁਦ ਰਕੂਦ ਸੀ ਗਏ ਮੇਰਾ ਵੀ ਕੋਈ ਬੱਚਾ ਮਾਪੇ ਦੀ 100% ਦੀ ਗੱਲ ਮੰਨਦਾ ਮਾਪੇ ਦਾ ਜ਼ਮਾਨਾ ਨਾਲ ਵੀ ਖੋਜੇ ਰਹਿਤ ਹੈ ਉਹਦਾ ਰਹਿਣਾ ਨਾ ਉਹਦਾ ਜੇ 5 10 20% ਵੀ ਵੰਡਾ ਹੋਵੇ ਤਾਲ ਵੀ ਖੋਜਉਂਦੇ ਨੇ ਬੜੀ ਮਨਜ਼ੂਰੀ ਨਾਲ ਮੋਹ ਘਰ ਤੇ ਪਰ ਜੇ ਉਹ 100% ਦੀ ਉਹ ਹੁਕਮ ਕਿ ਹੋਵੇ ਫਿਰ ਕੀ وجہ ਵੀ ਨਾ ਹੋ ਕਿਰਪਾ ਹੁਕਮ ਦੀ ਕੀ وجہ ਦਿੱਤਾ ਕੋਈ وجہ ਹੈ ਨਹੀਂ ਇਹ ਕਰਕੇ ਰੱਖੀਏ ਸਰ ਪ੍ਰਭੂ ਕੇ ਸੇਵਨ ਕਾਰਜ ਪੂਰੇ ਕਿਉਂਕਿ ਤਾਂ ਹੀ ਜੀਸਬਿਸ ਵਿੱਚ ਗੁਰਕਾਰ ਹਨਮਦ ਆਊਗਾ ਆਪਣੀ ਜੀਸਬਿਸ ਵਿੱਚ ਗੁਰਕਾਰ ਮਨ ਬਣੇ ਤੋਂ ਸੇਵਕ ਪਰਮੇਸ਼ਰ ਕੀ ਗੱਦਿਆ ਇੱਕ ਊੜਾ ਜਿਹਾ ਹਵਾ ਸਬਾਨ ਵੀ ਵਿਰੋਧ ਕਰ ਨਹੀਂ ਆ ਗਿਆ ਨਾਮ ਪੂਰੇ ਭਾਗ ਆਨ ਕਹਨਾਂ ਸਬਰੂ ਉਹ ਸਬਰਦੇ ਨੇ ਜਿਹਦੇ ਦਾ ਪੂਰੇ ਦੇ ਫਿਰ ਅਧੂਰੇ ਭਾਗਾਂ ਦੇ ਵਿੱਚ ਕਦੇ ਜੀ ਸਦਗਾ ਸਤ੍ਰੋਖ ਸਤ੍ਰੋਖ ਦੇ ਪੂਰੇ ਹਿਰਦੇ ਦੇ ਪੂਰੇ ਭਾਗ ਦੇ ਵਿੱਚ ਧਰੁਗਿਆਨ ਕਰੇ ਪਰ ਤੋ ਕੋਡਾ ਖਰਾਕੀਆ ਧਰੁਗਿਆਨ ਦੀ ਕਾਹ ਭੋਜ ਪੂਰਾ ਗਿਆਨ ਉਹ ਭਰਿਆ ਹੈ ਕੋਨਾਕ ਭਰਿਆ ਹੈ ਲੋਦਾ ਕੋਈ ਨਹੀਂ ਪੂਰੇ ਭਾਗ ਦੇ ਰੋਸ਼ਦੀ ਹੋ ਰੋਸ਼ਦੀਏ ਜੇ ਕੁਝ ਭਾਗ ਦੇ ਵਿੱਚ ਇਹਦੇ ਵਿੱਚ ਝੰਕਾ ਹੋਵੇ ਪੂਰਾ ਵਗਦੀ ਜਿਹੜੇ ਤਾਂ ਇਹ ਰੋਸ਼ਦੀ ਉਹਨਾਂ ਭਾਗ ਉਹਦਾ ਹੀ ਵੱਡਾ ਭਾਗ ਹੈ ਇਸ ਕਰਕੇ ਜਿਹੜੀ ਪਹਿਲਾਂ ਸਾਡੇ ਤੋਂ ਧਰ ਹੋਏ ਉਹ ਵੀ ਗੱਲ ਉਹੀ ਕਹਿੰਦੇ ਨੇ ਅਰਥਾਂ ਦੇ ਵਿੱਚ ਕਜੀ ਅਰਥੋਜ ਕਵੀ ਗੱਲ ਵਿੱਚ ਉਹ ਕਹਿੰਦੇ ਵਿਦਿਆਵੇ ਅਸਕਾਰਨੀ ਬੁੱਧੀ ਕਰ ਬੋਲਦਾ ਹੈ। ਇਹੋ ਸਾਸ਼ਟਰਾਜ ਮੁੱਖ ਸੰਨ ਪਿੱਛੇ ਕੰਮ ਅਨੁਸਾਰ ਮੈਂ ਰੋਦੀ ਰੋਕੀ ਨਹੀਂ ਬਿਲਕੁਲ ਤੇਰੀ। ਸਰੀਰ ਤੇ ਸਾਪ ਨਾਲ ਰਹਿਤਾ। ਮੱਛਰ ਨੂੰ ਇਹਨਾਂ ਘਰਾਂ ਕਿਹ ਜਿਹੜੀ ਆਜ਼ੂਦੀ ਚਾਹੀਦੀ ਹੈ। ਜਿਹੜੀ ਹੱਥੇ ਨੂੰ ਚਾਹੀਦੀ ਉਹਦੀ ਆਜ਼ੂਦੀ ਚਾਹੀਦੀ। ਇਦੋ ਅੱਡੋ ਅੱਡੋ ਜੀਵਾ ਦੀ ਅੱਡੋ ਅੱਡੋ ਗੱਲ 84 ਲੱਖ ਦੇ ਵਿੱਚ ਭਾਗ ਇਹ ਪੂਰਾ ਕਰਦਾ ਕਿਹੜਾ ਇਕਲੇ ਵੀ ਦਵਰ ਖੁੱਲਦੀ ਰਹੀ ਹੈ ਆਦਮੀ ਜਿਹੜੂ ਜਾ ਕੇ ਇਹਦਾ ਪੂਰਾ ਭਾਗ ਹੈ ਬਾਣੀ ਬਾਸਾ ਆਪਾਂ ਤਾਂ ਹੀ ਕਹਿੰਦੇ ਆ ਵੀ ਇਹ ਪਾਗਾਂੜਾ ਜੀ ਦੇਖੋ ਉੱਪਰ ਚਲਾ ਗਿਆ ਕਿਸੇ ਕੋ ਅਕਲ ਜ਼ਿਆਦਾ ਕਿਸੇ ਕੋ ਪੈਸਾ ਜ਼ਿਆਦਾ ਉਹ ਭਾਗ ਕਰ ਦਿੰਦੇ ਸਿਮਰਤੂ ਕੋਲੇ ਭਾਗ ਬੁੱਧੀ ਕਰਮਾਂ ਅਨੁਸਾਰ ਨਹੀਂ ਉਹਦੀ ਪਿੱਛੇ ਤੇ ਜੋ ਸਿੱਕਾ ਸੋਚੀ ਜੀ ਸਾਡੀ ਕਰਦੇ ਸਾਡੀ ਸੋਚ ਹੈ ਸਾਡੀ ਸੋਚ ਨਾਲ ਬੁੱਧੀ ਸੋਚ ਜਦੋਂ ਸਾਡੀ ਵਧੀਆ ਸੀ ਤਾਂ ਬੁੱਧੀ ਸਾਡੀ ਸੋਚ ਘਟੀਆ ਸੀ ਬੁੱਧੀ ਸਾਡੇ ਕੋ ਘਟਿਆ ਇੱਥੇ ਘਟਿਆ ਬੁੱਧੀ ਵਾਲੇ ਦੀ ਆਦਮੀ ਹੈ ਜੀ ਦਾ ਭਲਾ ਕਰਾਉਣ ਵਾਲੀ ਬੜਾਈ ਸੋਚਲ ਉਹ ਵੀ ਹੈ ਹਰ ਕਿਸਮ ਦਾ ਆਲੂ ਇਹ ਪਿੱਛੇ ਤੇ ਹੀ ਤੇ ਲਈ ਹੋਈ। ਬੁੱਢੀ ਕਰਮੂਦ ਸਾੜੀ। ਕੋਈ ਕਿਸੇ ਦੇ ਕਰਮ ਦੇ ਬਾੜੇ ਤੇ ਉਹਦੀ ਬੁੱਧੀ ਮਾੜੀ ਨਹੀਂ। ਉਹਦੀ ਬੁੱਧੀ ਘਟੀ, ਉਹ ਰਾਵਲ। ਉਹਦੀ ਖੁੱਟੀ ਹੈ। ਖੁੱਟੀ ਹੈ ਤਾਂ ਉਲਟਾ ਕੰਮ ਕਰ ਗਿਆ। ਇਹਵੇਂ ਜੋ ਜੋ ਉਲਟੇ ਕੰਮ ਤੇ ਘਾਇਨੇ ਸਭ ਬੁੱਢੀ ਉਹੇ ਜਿਹੀ ਦਿਖਾਈ ਉਹਨਾਂ ਨੇ ਹੋਰ ਕੀ ਦਿਖਾਇਆ। ਸੁਕਾ ਕੰਮ ਪੁੱਤੀ ਨਾਲ ਬੁੱਧੀ ਨਾਲ ਪੋਟਾ ਕਰੂਗਾ। ਜਦੋਂ ਉਹ ਹੀ ਹੈ ਵਾਲ ਵੀਕ ਜਾਂ ਦੂਏ ਪਾਸੇ ਲੱਗ ਗਿਆ ਉਹੀ ਬੁੱਧੀ ਪੱਠੀ ਦਿਖਾਈ ਆ ਸਭ ਕੋਈ ਧਲ ਬੁੱਧੀ ਬਦਲਦੀ ਹੋਈ ਦਿਖਾਈ ਹੋਈ ਜਾਂ ਉਹਨੂੰ ਤੁਸੀਂ ਕਹਾਣੀ ਬਣਾ ਕੇ ਲੈ ਲਓ ਚਾਹੇ ਤੁਸੀਂ ਬਰੀਕੀ ਨਾਲ ਸਮਝਣ ਨੂੰ ਇਹ ਚਾਹੀਦਾ ਜੀਵਨ ਚ ਪਲਟਾ ਬੁੱਧੀ ਨਾਲ ਆਉਂਦਾ ਜੀਵਨ ਜੇ ਪਲਟਿਆ ਕੋਈ ਘਰ ਨਹੀਂ ਜੀਵਨ ਜੇ ਬਦਲਾਵ ਨਹੀਂ ਆਇਆ ਤਾਂ ਕੋਈ ਅਸਰ ਨਹੀਂ ਆਉਂਦਾ ਪਲਟਾਉ ਤੇ ਬੁੱਧੀ ਨਾਲ ਬਦਲੀ ਸੋਚੀ